ਸ਼ਲੋਕ ਮਹਲਾ ਤੀਜਾ ਨਾਨਕ ਨਾਮ ਨਾ ਚਿਤਨੀ ਅਗਿਆਨੇ ਅੰਦਲੇ ਕਰਮ ਕਮਾਹੇ ਜਮਦਰ ਬੱਧੇ ਮਾਰੀਆਂ ਫਿਰ ਵਿਸ਼ਟਾ ਮਾਹੇ ਪਚਾਹ ਤੋ ਆ ਲੋਰਕਾ ਹੋਏ ਹਾਂਜੀ ਤੋ ਹੋਰੇ ਲੱਗੇ ਉਹ ਮਾਇਆ ਦੇ ਕਿਸੇ ਕੰਮ ਲੱਗੇ ਹੋਏ। ਹੋਰ ਠੀਕ ਹੈ ਜੀ। ਮਾਰੀਆਂ ਫਿਰ ਵਿਸ਼ਤਾ ਮਾਹੇ ਪਚਾਈ। ਜਮਦਰ ਤੇ ਜਮਦਰ ਦਰਵਾਜ਼ੇ ਦੇ ਬੱਦੇ ਰਹਿੰਦੇ ਨੇ ਹੋ। ਅਗਾਰੇ ਜੀ। ਮਹੱਲਾ 3 मानक सतगुरु सेवा अपना ते से जन परवान हर के नाई समाए रहे चुका आवण जान सतगुरु सेवा अपना या अपना सतगुरु सेवा जो अपनी सतगुरु ने गल कही है ओ दे अनुसार जीवत जी होए ओ है ते जन ਹਰ ਕੇ ਨਾਂ ਸਮਾਏ ਰਹੇ ਚੁੱਕਾ ਆਉਣ ਜਾਂ ਉਹ ਜਾਂ ਚੁੱਕ ਜਾਂਦੇ ਬੁੱਕ ਜਾਂਦੇ ਖਤ ਹੋ ਜਾਂਦੇ ਜੰਮਲ ਵਾਲ ਰੋਹ ਦਾ ਆਪਣਾ ਸਤਗੁਰ ਕੀ ਹੁੰਦਾ ਜੀ ਸਤਗੁਰ ਆਪਣਾ ਹੁੰਦਾ ਆਪਣਾ ਸਤੂਰ ਹੈ ਕੋਈ ਕਿਦਰ ਸਤਗੁਰ ਤੇ ਖਾਲੀ ਕੋਈ ਨਹੀਂ ਠੀਕ ਹੈ ਸਭ ਦੇ ਅੰਦਰ ਸਤਗੁਰ ਹੈ ਹਾਂ ਜੀ ਸਤਗੁਰ ਗੱਲ ਨੂੰ ਪੜੀ ਬੰਦਾ ਦੇ ਬੰਦਾ ਪੜੀ ਤੱਕ ਬੋਲਦੇ ਇਹ ਇਹ ਦਾ ਭਾਵ ਹੈ ਕਿ ਇਹ ਸਤਿਗੁਰ ਮੰਨ ਨੂੰ ਆਪਣਾ ਇਸ ਗਿਆਨ ਦੇ ਨਾਲ ਮਨਾਉਣਾ ਹੈ ਜੀ ਇਹੀ ਸੇਵ ਆ ਬਿਲਕੁਲ ਪੜੀ ਧਨ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ਅੰਤੇ ਮਾਇਆ ਕਰਕੇ ਮਾਇਆ ਇਕੱਠੀ ਕਰ ਲਈ ਸੁਤਕਾਲ ਦੁਖਦਾਈ ਹੋਈ ਹੈ ਕੋਈ ਸੁਭਧੀ ਹੈ ਨਾ ਖੱਤੈ ਦੁਖਾਈ ਘਰ ਮੰਦਰ ਮਹਿਲ ਸਵਾਰੀਆਂ ਕਿਛ ਸਾਥ ਨਾ ਜਾਈ ਘਰ ਬੁੱੱਲ ਦੇ ਗੁੱਦੜ ਵਹਾਲਾ ਕੁਝ ਵੀ ਸਾਥ ਨਹੀਂ ਕਰਨ ਵਾਲਾ ਇਹ ਤੇ ਜੇ ਨਾਲ ਇਹਨਾਂ ਚੋਂ ਕਿਸੇ ਚੀਜ਼ ਨੇ ਨਹੀਂ ਜਾਣਾ ਕਿਉਂਕਿ ਮਾਇਆ ਹੈ ਜੀ ਮਾਇਆ ਮਾਇਆ ਸਾਥ ਨਾ ਹੋਈ ਹਰ ਰੰਗੀ ਤੁਰੇ ਨਿਤ ਪਾਲੀਆਂ ਕਿੱਤੇ ਕਾਮਨਾ ਆਈ ਪਰ ਜੋ ਹਾਂ ਠੀਕ ਨਹੀਂ ਬਣ ਰਹੀ ਹਾਰ ਦਾ ਮਤਲਬ ਹੈ ਕਿ ਹਰ ਦੁਆ ਜੀ ਹਰੇ ਸਿਆਰੀ ਵਾਲਾ ਨਹੀਂ ਹੈ ਹਾਂ ਹੁਣ ਗੱਲ ਬਣਦੀ ਹੈ ਹਰ ਦਾ ਤਰਾਂ ਤਰਾਂ ਦੇ ਹਰ ਰੰਗੀ ਦੀ ਵਾਰਤੀ ਵੇਪਾਂ ਪੜਦੇ ਨਾ ਹਰੇਕ ਰੰਗ ਦੇ ਹਰੇਕ ਸਿਆਰੀ ਨਹੀਂ ਨਾ ਹੈ ਠੀਕ ਹੈ ਤੁਰੇ ਕੋਰੇ ਇੱਥੇ ਹਰ ਸਿਹਾਰੀ ਨਾਲ ਨਹੀਂ ਲਿਖਿਆ ਹਾਂਜੀ ਆਸਾ ਕੀ ਬਾਰ ਚ ਵੀ ਇਹੀ ਤੁਰੇ ਫੁਲਾਣੇ ਪਾਉਣ ਹਰ ਰੰਗੀ ਹਰਮਸ ਜੀ ਹਰ ਰੰਗੀ ਤੁਰੇ ਨਿਤ ਪਾਲੀ ਹਰ ਪ੍ਰਕਾਰ ਘੋੜੇ ਹਾਂਜੀ ਨਿਤ ਪਾਲੀ ਐ ਤੇ ਕਾਮਨਾ ਆਈ ਕੋਈ ਕਹਿੰਦੇ ਸਪਾਲਦਨ ਤੇ ਖਬਰ ਯੋਦੇ ਠੀਕ ਹੈ ਰਾਜਪਾਟ ਦੀ ਗੱਲ ਹੋ ਰਹੀ ਹਾਂਜੀ ਹਾਂਜੀ ਜਨ ਲਾਵੋ ਚਿੱਤ ਹਰ ਨਾਮ ਸਿਉ ਅੰਤ ਹੋਏ ਸਖਾਈ ਇਸ ਕਰਕੇ ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਜਨ ਆਦੇ ਜਿਹੜੇ ਉਹਦੇ ਗੁਰਮੁਖਰੇ ਉਹਨਾਂ ਨੇ ਨੂੰ ਸੁਖ ਮਿਲਿਆ ਇਸ ਇਹ ਹਰ ਕਿੰਝਾਂ ਦੇ ਉਹ ਲੋਕ ਤੇ ਹੋਵੇ ਨੇ ਅਸ਼ੋਕ ਪਾਉਂਦੇ ਕੋਈ ਬੜੇ ਬੜੇ ਬਰਹਿਲ ਬਰੂਦ ਹੈ ਕੋਈ ਘਰ ਬਰੂਦ ਹੈ ਕੋਈ ਕੁਛ ਬਰੂਦ ਹੈ ਕੋਈ ਕੋੜੇ ਪਾਉਂਦਾ ਉਰਲ ਉਹ ਤੇ ਸੁਗਰੀਏ ਉਹ ਕਿਸੇ ਨਾ ਹੋਵੇ ਵਿਆਕਰਣ ਜਾਂ ਅੱਖਰ ਦਾ ਬੋਧ ਨਾ ਸਮਝੀਏ ਤਾਂ ਫਿਰ ਇੱਥੇ ਕਿਹੜੇ ਅਰਥ ਕਰਾਂਗੇ ਬਿਨਾ ਬੋਧ ਤੋਂ ਇੱਥੇ ਹਰ ਜਿਹੜਾ ਮੁਕਤ ਹਰ ਦਾ ਭਾਵ ਹਰੀ ਨਹੀਂ ਹੈ ਇੱਥੇ ਹਰ ਹੈਗਾ ਹਰੇਕ ਹੈ ਜੀ ਕੋਵ ਚ ਰਬੋਵ ਜੀ ਹਾਂਜੀ ਹਰ ਰੰਗੀ ਕਿ ਹਰੇਕ ਰੰਗ ਦੇ ਤੁਰੇ ਤੁਰੇ ਦਾ ਭਾਵ ਹੈਗਾ ਕੋਟ ਦੇ ਹਰ ਜਿਹੜਾ ਸਿਹਾਰੀ ਵਾਲਾ ਉੱਪਰ ਹਰ ਕੇ ਨਾਏ ਆਇਆ ਇੱਥੇ ਹਰ ਰੰਗੀ ਆਇਆ ਇਹ ਦੋਹਾਂ ਅੱਖਰ ਆਪਾਂ ਦੇਖੀਏ ਤਾਂ ਇਹਨਾਂ ਦੀ ਬਣਤਰ 'ਚ ਫਰਕ ਹੈ ਜੀ ਉਹ ਸਿਹਾਰੀ ਚ ਹੈ ਜੀ 'ਚ ਹੈ ਨਹੀਂ ਥੱਲੇ ਵੀ ਜਨ ਲਾਵੋ ਚਿਤ ਹਰ ਨਾਮ ਸਿਉ ਇੱਥੇ ਫੇਰ ਸਿਹਾਰੀ ਆ ਗਈ ਹੈ ਠੀਕ ਹੈ ਜੀ ਇੱਥੇ 15 ਪੌੜੀ ਸਮਾਪਤੀ ਹੈ ਜੀ ਚਲੋ ਜੀ